ਕਿ ਕਬੀਰ ਮੁਕਤ ਦਵਾਰਾ ਸੰਕੁੜਾ ਰਾਈ 10ਵੇਂ ਭਾਈ ਮਨ ਤੋਂ ਮਹਿਲ ਹੋਇ ਰਹਾ ਨਿਕਸਿਆ ਕਿਉ ਕਰ ਕਬੀਰ ਕਹਿੰਦਾ ਉਹਨਾਂ ਨੂੰ ਕਹਿੰਦਾ ਜਿਹੜਾ ਮੁਕਤ ਦਵਾਰ ਆ ਉਹ ਬਹੁਤ ਚੌੜਾ ਨਹੀਂ ਹੈ ਸੰਪੁਰ ਦਾ ਮਤਲਬ ਸੂਖਸ਼ ਕੱਲ੍ਹ ਦੇਖੀ ਵਾਰ ਹੈ ਤੇ ਮਾਰਗ ਤਲਵਾਰ ਦੀ ਧਾਰ ਜਿਹੀ ਦੁਨੀਆ ਨਾ ਇੰਨਾ ਅਗੇ ਮਾਰਗੇ ਉੱਤੇ ਸੰਕਰਾ ਤੀਜੇ ਪਾਸਾ ਨੇ ਕਹਤਾ ਖੜਾ ਪਿੱਛੀ ਦੀ ਜਿੱਤੇ ਦੀ ਬਾਹ ਨਿਕਲ ਜੂਗਾ ਉਹ ਇੰਨਾ ਅਗੇ ਹੈਗਾ ਮੁਕਤ ਦਵਾਰਾ ਕਿਉਂਕਿ ਜਿੱਤੇ ਦੀ ਬਾਹ ਨਿਕਲ ਜੁ ਉਹਰ ਤਾਂ ਨਿਕਲ ਜਾਂਦੀ ਆ ਉੱਥੇ ਦੀ ਜਿੱਤੇ ਦੀ ਹਵਾ ਨਹੀਂ ਨਿਕਲ ਸਕਦੀ ਉੱਥੇ ਦੀ ਆਕਾਸ਼ ਨਿਕਲ ਜਾਂਦਾ ਜਿੱਥੇ ਦੀ ਆਕਾਸ਼ ਨਹੀਂ ਨਿਕਲ ਸਕਦਾ ਉੱਥੇ ਦੀ ਜੋਤ ਨਿਕਲ ਜਾਂਦੀ ਹੈ ਜਿੰਨਾ ਵਰਜੀ ਸਭ ਕਰਾ ਹੋਵੇ ਇਹਨੂੰ ਲੰਬਾ ਕੀ ਗੱਲ ਲੂਗਾ ਸ਼ੰਕਰਵਾ ਆਰਾ ਸਭ ਰਾਈ ਦਸਵੇਂ ਭਾਗ ਐ ਸਮਝੋ ਜਿਹੜੀ ਰਾਈ ਦਾ ਦਾਣਾ ਹਾਂਜੀ ਉਹਦਾ ਦਸਵਾਂ ਹਿੱਸਾ ਹੈ ਦਸਵਾਂ ਹਿੱਸਾ ਹੈ ਪਾਇਰੋਂ ਭਾਗ ਹਾਂਜੀ ਦਸਵਾਂ ਹਿੱਸਾ ਬੰਦ ਤੋਂ ਮੈਗਲ ਹੋ ਰਿਹਾ ਲੋਕ ਆ ਤੇ ਵੀ ਬਣੇ ਬੱਚਾ ਵਿਦਿਆ ਕਰ ਜਾਏ ਕਿ ਜਾਵੇ ਕਾਰੀ ਲੋਕ ਜਿਹੜੇ ਨੇ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਜਾਣ ਦਾ ਮਤਲਬ ਇਹ ਹੈ ਪਾੜ ਵਾਸਤੇ ਛੇਦ ਹੈਗੇ ਨੇ ਬਰੀਕ ਸੱਚ ਕਰਨ ਜਾਣ ਵਾਸਤੇ ਪਰ ਰਾਈ ਦਸਮੇ ਭਾਏ ਨੇ ਪਿੰਜਰ ਪੰਛੀ ਬੰਦਿਆ ਕੋਏ اون ਵੀ ਤਾਂ ਪੰਛੀ ਪਿੰਜਰੇ ਚ ਪਾਇਆ ਹੋਇਆ 10 ਦਵਾਰੇ ਨੇ ਕਿੱਡੇ ਕਿੱਡੇ ਨੇ ਮੂੰਹ ਜਿਆਦਾ ਅਲਟਦਾ ਤੇ ਕਿੱਡਾ ਮੂੰਹ ਇਹਦਾ ਇਕੜੇ ਕਦੇ ਜੇ ਸੁਰਾਖਾ ਤੋਂ ਹੀ ਨਾ ਪਿੰਜਰਾ ਉਹ ਸੁਰਾਖ ਰੱਖੇ ਨੇ ਪੰਛੀ ਨਹੀਂ ਨਿਕਲ ਸਕਦਾ ਉਹਦੇ ਸਾਈ ਪਰ ਪੰਛੀ ਤਾਂ ਸਾਰੇ ਥੰਬੀ ਉੜ ਕੇ ਨਿਕਲਣਾ ਆਤਮਾ ਸਰੀਰ ਛੱਡ ਕੇ ਆਤਮਾ ਕੱਢੇ ਨਿਕਲ ਜਾਊਗਾ ਜਿੱਦਣ ਇਹ ਸਰੀਰ ਤਿਆਗ ਤਾ ਉੱਥੋਂ ਨਿਕਲ ਜਾਣਾ ਇਹਨੇ ਉੱਥੋਂ ਪਰ ਰੋਕ ਨਹੀਂ ਸਕਦਾ ਕਿਉਂ ਸਰਾਖ ਹੈਗੇ ਨੇ ਆਟਾ ਛਲਨੇ ਵਾਲੀ ਚੱਲਦੀ ਉਹਦੀ ਸਰਾਖ ਹੁੰਦੇ ਨੇ ਆਟਾ ਵੀ ਜਾਂਦਾ ਬੂਰਾ ਰਹਿ ਜਾਂਦਾ ਬਰੀਕ ਜੀ ਜਾਂ ਨਿਕਲ ਜਾਂਦੀ ਹੈ ਇਸ ਕਰਕੇ ਉਹ ਕਹਿੰਦਾ ਰੋਣਾ ਨਹੀਂ ਨਿਕਲਣਾ ਜਦੋਂ ਇਹ ਰਹਿ ਜਾਊਗਾ ਇਹ ਬਰੀਕ ਹਾਲਾ ਮੁਕਤ ਦੁਆਰੇ ਹੈ ਪਾਪੀ ਕਰਦੀ ਜਗਾ ਬਹੁਤ ਨੇ ਜਿਵੇਂ ਸੋਗ ਹੋਰ ਛੋਟਾ ਹੋਣਾ ਪੈਣਾ ਗੁਰੂ ਬਣ ਕੇ ਨਹੀਂ ਨਿਕਲ ਸਕਦਾ ਕੋਈ ਸਿੱਖ ਬਣ ਕੇ ਨਿਕਲੂਗਾ ਦਾਸ ਬਣ ਕੇ ਨਿਕਲੂਗਾ ਗੁਰੂ ਬਣ ਕੇ ਨਹੀਂ ਆ ਸਕਦਾ ਅਜ ਤੱਕ ਕੋਈ ਗੁਰੂ ਬਣ ਕੇ ਨਿਕਲਿਆ ਨਾ ਕੋਈ ਨਿਕਲ ਸਕੇ ਗੁਰੂ ਤਾਂ ਕਾੜੀ ਹੈ ਜਿੰਨੇ ਗੁਰੂ ਹੋਏ ਨੇ ਅੱਜ ਤੱਕ ਸਭ ਹਕਤਾਰੀ ਹੋਣਗੇ ਏ ਗੁਰੂਆਂ ਦਾ ਗੁਰੂਆਂ ਦਾ ਨਾਲ ਸਾਡੇ ਮੂੰਹ ਜੜਾਤਾ ਇਨਾਂ ਦੀ ਦੁਆਤਾ ਆਪਣੇ ਜੱਗ ਦੇ ਆਪਣੇ ਗੁਰੂਆਂ ਨਾਲ ਜਰ ਹੁੰਦੀ ਸੀ ਸਾਡਿਆਂ ਦੀ ਨਾਲ ਹੋਣ ਲੱਗੀ ਸਾਡੇ ਸ਼ਰੀਕ ਬਣਾਤੇ ਅਗਲੇ ਨੇ ਸੰਤ ਵੀ ਗੁਰੂ ਬਣ ਗਏ ਇਹਨਾਂ ਨੇ ਪਲੈਂਸੀ ਇਹਨਾਂ ਦਾ ਇਹਨਾਂ ਦੇ ਗੁਰੂਆਂ ਦਾ ਸਰੂਪ ਦੇ ਤਰੀਕੇ ਨਾਲ ਗੁਰੂ ਬਣਾ ਦਿੱਗੇ ਛੇ ਇਹ ਸਿੱਖ ਬੋਲਣ ਜੋਗੇ ਨਾਲ ਰਹਿਣ ਸਿੱਖ ਬੋਲਣ ਨੇ ਉਹ ਕਿਹੜਾ ਕਿੱਥੇ ਸਰਵਤਾਰਨ ਸਮੇਂ ਲਾਂਡੇ ਜਾਂਦੇ ਆਂ ਬੋਲਦੇ ਨੇ ਕਿ ਸਵਾਦੀ ਖੇ ਘਰਮਾਦੀ ਤਾਂ ਗੱਲ ਵੀ ਨਹੀਂ ਆਉਂਦੀ ਇਹਨਾਂ ਨੂੰ ਛੋ ਬੋਲਦੇ ਨੇ ਝੂਠ ਬੋਲਦੇ ਸਰਬਤਕਾ ਭਲਾ ਕੀ ਸਰਬਤ ਦਾ ਭਲਾ ਤੁਸੀਂ ਮੰਨ ਲਿਆ ਅੰਦਰ ਤੁਹਾਡੇ ਸਰਬਤ ਦਾ ਭਲਾ ਹੈ ਜੀ ਝੂਠ ਬੋਲਦੇ ਆਂ ਫਿਰ ਗੁਰਬਾਣੀ ਤੁਹਾਨੂੰ ਕੁਝ ਕਹਿੰਦੀ ਹੈ ਅਮਲੀ ਤੌਰ ਤੇ ਤੁਸੀਂ ਕੁਝ ਹੋ ਮਾਰਦ ਸਭੇ ਇੱਕੇ ਪਹਿਚਾਣ ਬੋ ਪਹਿਚਾਣਦੇ ਹੋ ਫਿਰ ਤੁਸੀਂ 47 ਸਕੌਂਟ ਤੇ ਫਿਰ ਬੋਲਤ ਕੀ ਯਾਦ ਨਹੀਂ ਸੀ ਕਿਉਂ ਬਾਹਰ ਕੱਢੇ ਇੱਕ ਇੱਕ ਨੂੰ ਨਹੀਂ क्यों ਤੁਸੀਂ ਇਹ ਕਰਕੇ ਰਾਈ ਦੱਸਣਾ ਭਾਏ ਬੰਦ ਤੋਂ ਬੈਗਲ ਹੋ ਰਿਹਾ ਆਪ ਤਾਂ ਹਾਥੀ ਬਣੇ ਫਿਰਦੇ ਨੇ ਹੰਕਾਰੀ ਦੀਖਿਆ ਕਿਉਂ ਕਰ ਜਾਏ ਕਿ ਮੈਨੇ ਕਰ ਜਾਊਗਾ ਤੁਸੀਂ ਅੱਜ ਮੁਕਤੀ ਦਾ ਉਪਦੇਸ਼ ਕਬੀਰ ਦਾ ਗੱਲਿਆ ਮੁਕਤੀ ਦੇ ਉਦੇਸ਼ ਤੋਂ ਸ਼ੁਰੂ ਕਰਦਾ ਗੁਰਬਾਣੀ ਦਾ ਮੁਕਤੀ ਦੇ ਉਦੇਸ਼ ਤੋਂ ਹੀ ਗੱਲ ਸ਼ੁਰੂ ਕਰਤੀ ਗਈ ਇਹਨਾਂ ਦਾ ਮੁਕਤੀ ਦਾ ਉਦੇਸ਼ ਥੇ ਗਿਆ ਜੇ ਕਿਸੇ ਨੂੰ ਮੁਕਤੀ ਚਾਹੀਦੀ ਹੋਵੇ ਤਾਂ ਇਹਨਾਂ ਦਾ ਰਾਹ ਚੱਰੀਦਾ ਰਾਜ ਹੰਕਾਰ ਦਾ ਪ੍ਰਤੀਕ ਰਾਜ ਤਾਂ ਹਾਥੀ ਦੇ ਉੱਤੇ ਚੜਦਾ ਹੈ ਮੈਗਲ ਉਹ ਤਾਂ ਮੈਗਲੇ ਕਹਿੰਦਾ ਮੈਗਲੇ ਵੀ ਉੱਤੇ ਪਖੜਾ ਪਾਈ ਬੈਠਾ और ਦਾ ਪਿੰਜਰਾ ਹੁੰਦਾ ਹਾਥੀ ਦੇ ਪਿੰਜਰੇ ਦੇ ਵਿੱਚ ਛੋਟੇ-ਛਰਾਕ ਹੁੰਦੇ ਨੇ ਪਰ ਨਿਕਲ ਨਹੀਂ ਸਕਦਾ ਉੱਥੇ ਵੀ ਉਥੇਰੇ بڑے-ਬڑے ਛਰਾਕ ਹੁੰਦੇ ਹਾਥੀ ਦੇ ਛਰਾਕ 'ਚ ਹੀ ਆਦਮੀ ਨਿਕਲ ਜਾਂਦਾ ਹੈ ਪਰ ਹਾਥੀ ਨਹੀਂ ਨਿਕਲ ਸਕਦਾ ਹਾਥੀ ਵੱਡਾ ਹੁੰਦਾ ਹੈ ਜੀ ਐਸਾ ਸਤਗੁਰ ਤੁਹਾਨੂੰ ਕਹਿੰਦੇ ਇਹਦਾ ਮਤਲਬ ਇਹ ਨਹੀਂ ਕਿ ਮੁਕਤੀ ਮਿਲਣੀ ਆਉਂਦੀ ਇਸਾਂ ਨੂੰ ਕੁੱਤੀ ਹੋਏ ਨਹੀਂ ਸਕਦੀ ਇੱਥੇ ਨਹੀਂ ਨਹੀਂ ਐਸਾ ਸਤਗੁਰ ਜੇ ਮਿਲੇ ਐਸਾ ਕੋਈ ਸਤਗੁਰ ਮਿਲ ਜੇ ਕਿਸੇ ਨੂੰ ਟੁੱਠਾ ਕਰੇ ਪਸਾਓ ਸਮਝਾ ਦੇ ਗੱਲ ਉਹ ਮੁਕਤੀ ਦਾ ਆਤਮਾਨ ਉਮੜ ਲਿਆ ਉਲੂ ਦੇ ਸਰੀਰ ਥੋੜੀ ਮੁਕਤੀ ਮਿਲਣੀ ਆ ਆ ਦਵਾ ਦਾ ਜਿੱਥੇ ਦੀ ਬਾਹਰ ਨਿਕਲ ਜਾਂਦਾ ਉਥੇ ਦੀ ਤਾਂ ਹਵਾ ਵੀ ਨਿਕਲ ਜਾਂਦੀ ਹੈ ਜਿੱਥੇ ਵੀ ਹਵਾ ਨਹੀਂ ਨਿਕਲ ਸਕਦੀ ਉਥੇ ਦੀ ਆਕਾਸ਼ ਨਿਕਲ ਜਾਂਦਾ ਹੈ ਦੀ ਆਕਾਸ਼ ਨਹੀਂ ਨਿਕਲ ਸਕਦਾ ਉਥੇ ਦੀ ਅਤਵਾ ਨਿਕਲ ਜਾਂਦੀ ਹੈ ਆਕਾਸ਼ ਤਾਂ ਤਾਂ ਮਾਇਆ ਹਾਂ ਹਾਂ ਉਹ ਤਾਂ ਮਾਇਆ ਤੋਂ ਵੀ ਸੁਖੀ ਬੁਲੂ ਕੋਲ ਲੋਖ ਲੂਗਾ ਉਹ ਇਹ ਗੱਲ ਸਮਝਾ ਗਵੇ ਕਰੇ ਪਸਾਉ ਪਸਾਉ ਉਹਦੀ ਬੁੱਧੀ 'ਚ ਪਸਾਉ ਕਰ ਦਵੇ ਉਹਦੀ ਬੁੱਧੀ ਨੂੰ ਵਿਕਸਿਤ ਕਰ ਦਵੇ ਯਾਰ ਨਾ ਇਹ ਕਹਿੰਦਾ ਵੀ ਸੁਣੇ ਜੀਵ ਜਾਣਾ ਨਾ ਮੁਕਤੀ ਆਪ ਮਰੇ ਤੇ ਹੀ ਮੁਕਤੀ ਬੱਦੀ ਆ ਜਿਉਂਦੇ ਨੂੰ ਮੁਕਤੀ ਮਿਲਦੀ ਜਿਵੇਂ ਜਿਉਂਦੇ ਨੂੰ ਮੁਕਤੀ ਮਿਲਦੀ ਜ਼ਰੂਰ ਹੈ ਪਰ ਉਹਦੀ ਇਤਰਕੁਡੀ ਛੱਡੀ ਹੁੰਦੀ ਆ ਉਹ ਉੱਤਾ ਮਰਿਆ ਹੋਇਆ ਹੀ ਆ ਉਹ ਉਹ ਮਰਨਾ ਉਹ ਨੂੰ ਤਾਂ ਪਛਾਣ ਲਈ ਮਰ ਕੇ ਨਾ ਜਾਣਿਆ ਕੋਈ ਉਹ ਜਿਹਨਾਂ ਨੂੰ ਤਾਂ ਜਾਣਨ ਦੀ ਉਹ ਗੱਲ ਕਰਦੀ ਹੈ ਗੁਰਬਾਣੀ ਮਰਤਾ ਮਰਦਾ ਜਗ ਬੁਹਾ ਮਰ ਪੀਣਾ ਜਾਣਿਆ ਕੋਏ ਪਰ ਉਹ ਮਨਣਾ ਕੀ ਹੈ ਜਿਉਂਦੇ ਮਨਣਾ ਇਹੀ ਤਾਂ ਸਾਰੀ ਗੁਰਬਾਣੀ ਦਾ ਵਿਸ਼ਾ ਜੇ ਤੂੰ ਜੋਦਾ ਹੀ ਮਰਜੀ ਮਨੇ ਜੇ ਆਪਣੀ ਇੱਛਾ ਤਿਆਗ ਤੂੰ ਜੀਉਦਾ ਹੀ ਤੂੰ ਮੁਕਤ ਦੁਆਰੇ ਤੇ ਬਾਹਰ ਖੜਾ ਹੈ ਚ ਜੇ ਤਾ ਆਪਣੀ ਮਰਜੀ ਛੱਡਦੀ हुकुमत टकरा तेरा बंद हो गया पाणा तेनु बिठा करके लगन लाग गया तू उधणे मुक्त है बाहर आ तू शुद्ध आत्म सागर ते बाहर है तू क्या करे पसौ ऐसा सतगुरु जे मिले पेन ऐसा कोई सतगुरु मिले फिर खुश होवे फिर पसौ करे फिर तेरी बुद्धि पसारा करे बुद्धि दा विकास करे ਮੁਕਤ ਤੋ ਆਰਾਮ ਮੁਕਾਬ ਗੁਤਤੋ ਆਰਾਮ ਆਬਦੇਰਾ ਮੁਕਾ ਓਏ ਆਤਮਾ ਵਾਸਤੇ ਮੁਕਲਾ ਹੈ ਸਰੀਰ ਵਾਸਤੇ ਸੰਕਰ ਹੈ। ਮਾਇਆ ਵਾਸਤੇ ਸੰਕਰ ਹੈ ਆਤਮਾ ਵਾਸਤੇ ਸੰਕਰ ਨਹੀਂ ਹੈ। ਸੱਜੇ ਹੋਊ ਜਾਂ ਚਾਹੇ ਉਧਰ ਚਲੇ ਜਾਇਆ ਚਾਹੇ ਉਧਰ ਚਲੇ ਜਾ। ਜੇ ਮੁਕਤ ਹੋ ਤੇ ਬਾਹਰ ਚਲੇ ਜਾਇਆ ਚਾਹੇ ਜਰਾਇਤ ਤੇ ਨ ਕੋਨ ਰੋਕ ਸਕਦਾ। ਕਾਇ ਤੇਰਕੁਡੀ ਚ ਬੈਠ ਜਾ ਜਾ ਕੇ ਤੇਰਕੁਡੀ ਕੀ ਆ ਪਿੰਜਰੇ ਦੇ ਅੰਦਰ ਪਿੰਜਰੇ ਦੇ ਵਿੱਚ ਬੈਠਣਾ ਤੇਰਕੁਡੀ ਚ ਬੈਠ ਜਾ ਜਾ ਕੇ ਜੇ ਹਿਰਦੇ ਜਵੇਂ ਬਾਹਰ ਠੀਕ ਗਿਆ ਨਾ ਪੰਛੀ ਪਿੰਜਰ ਬੰਦਿਆ ਕੋਏ ਪੰਛੀ ਬੰਨਿਆ ਹੋਇਆ ਤੇਰਕੁਡੀ ਚ ਪਿੰਜਰੇ ਚ ਛੱਤ ਸੁਰਾਖ ਨੇ ਅੱਛਾ ਤ੍ਰਿਕੂਟੀ ਦੇ ਆਲ ਨਾਲ ਦੋ ਨੱਕ ਤੇ ਨੇ ਦੋ ਅੱਖਰ ਨੇ ਦੋ ਕੰਨਾਂ ਨੇ ਕਮੂਦ ਛੇੜੀ ਭਰਮੇ ਮੁਕਤ ਨਾ ਹੋਏ ਸੁਰਾਖਾਂ 'ਚ ਹੀ ਦੇਖੀ ਜਾਂਦਾ ਉੱਡ ਨਹੀਂ ਸਕਦਾ ਮੁਕਤੀ ਨਹੀਂ ਮਿਲਦੀ ਛੇੜੀ ਭਰਮੇ ਮੁਕਤ ਨਾ ਹੋਏ ਮੁਕਤੀ ਦੀ ਪ੍ਰਾਪਤ ਕਰ ਸਕਦਾ ਅੱਖਾਂ ਨਾਲ ਦੇਖ ਤੇ ਮੁਕਤੀ ਨਹੀਂ ਮਿਲਣੀ ਬੰਨਾਂ ਨਾਲ ਸੁਣ ਤੇ ਮੁਕਤੀ ਨਹੀਂ ਮਿਲਣੀ ਬੁੱਧੀ ਨਾਲ ਸਮਝੇ ਤੇ ਮੁਕਤੀ ਮਿਲਦੀ ਪਾਣੀ ਸੁਣਨੇ ਤੇ ਮੁਕਤੀ ਵਰਦਦੀ ਨਹੀਂ ਤਾਂ ਪੜਿਆ ਨਾ ਹੀ ਭੇਦ ਕੁਝਿਆ ਪਾਵਣਾ ਬੁੱਧੀ ਦਾ ਵਿਸ਼ਾ ਬੁੱਧੀ ਧੰਨਾ ਦਾ ਵਿਖਿਆ ਸੁਣਨਾ ਜ਼ਰੂਰ ਹੈ ਪਰ ਮੁਕਤੀ ਨਹੀਂ ਹੈ ਅੱਖਾਂ ਦਾ ਵਿਸ਼ਾ ਪੜ੍ਹਨਾ ਜਰੂਰ ਹੈ ਪਰ ਮੁਕਤੀ ਨਹੀਂ ਹੈ ਜੀਵ ਦਾ ਤਾਂ ਖੱਬੇ ਹੋਰ ਹੈ ਸਾਧਾ ਦਾ ਤਾਂ ਖੱਬੇ ਹੋ ਰਿਹਾ ਅੱਖਾਂ ਤੇ ਕੰਨ ਦੋਈ ਚੀਜ਼ਾਂ ਨੇ ਬਸ ਹਾਂ ਛੇ ਜਦੋਂ ਕਿਹਾ ਛੇਰੀ ਪਰਮਾ ਮੁਕਤ ਨਾ ਹੋਏ ਸੁਰਾਅ ਛੇਰ ਕਹਿੰਦੇ ਨੇ ਛੇਰੀ ਜਿਹਨੂੰ ਛੇਦ ਕਹਿੰਦੇ ਨੇ ਛੇਦ ਹੂੰ ਹੂੰ ਉਹਨੂੰ ਗਬੀਰ ਦੀ ਭਾਸ਼ਾ 'ਚ ਸ਼ੇਰ ਵੀ ਕਹਿੰਦੇ ਨੇ ਕਬੀਰ ਦੀ ਵਰਤਣੀ ਦੀ ਨਹੀਂ ਵਰਤਣੀ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਓਮੇ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਨੋ ਨਾ ਮੁਖਤਜ਼ਵਾਰ ਆ ਅੱਤੀਕਾ ਉਹ ਮੁਖਤਜ਼ਵਾਰ ਦਾ ਬਹੁਤ ਵਧੀਆ ਪਹਿਲਾਂ ਹੀ ਵਧੀਆ ਰੱਖਿਆ ਹੋਇਆ ਅੱਤੀਕਾ ਬਿੰਨਾ ਸੋਹਣਾ ਮੁਖਤਜ਼ਵਾਰ ਕੋਈ ਜਾਨਦਾ ਹੀ ਹੋਏ ਸਜਾਏ ਪਰ ਜੇ ਛੋਟਾ ਬਣੇ ਉਹ ਜਾਨਦਾ بڑا ਬਣ ਕੇ ਨਹੀਂ ਜਾ ਸਕਦਾ ਇੱਥੇ ਫੇਰ ਮਾਰੀ ਗੱਲ ਉੱਥੇ ਗੋਡੇ ਤੇ ਨੰਨਾ ਹੁੰਦਾ ਛੋਟਾ ਗੁਰੂ ਹੁੰਦਾ بڑا ਅੱਛਾ ਜੀ ਸਬ ਤੋ ਛੋਟਾ ਬਵੇਂ ਤਾਂ ਜਾਂਦਾ ਨਾਨਾ ਕਹਿੰਦੇ ਸਬ ਤੋਂ ਛੋਟਾ ਕਰਪੂਰ ਦੀ ਜਿਸਦਾਈ ਹੈ ਦੀਜ ਤੇ ਅਤ ਦੀਜ ਨਾਨਕ ਤਿੰਕੇ ਸੰਗ ਸਾਥ ਵੱਡਿਆਂ ਸਿਉ ਘਾਰੀਸ ਇੱਕ ਕਹਿੰਦਾ ਨਾਨਕ ਸੰਗ ਸਾਥ ਫਿਰ ਨਾਨਕ ਫੇਚਾ ਗੁਰੂ ਬਣ ਲੱਗਾ ਕਰਦੇ ਕੀ ਰਹਿੰਦੇ ਨੇ ਕੀ ਕਰਦੇ ਰਹਿੰਦੇ ਰਿਪਤ ਪਾਸੇ ਰਹਿਣਾ ਇਹ ਤਾਂ ਨਾਨਕ ਕਹਿਣ ਨਾ ਦੇਖ ਨੂੰ ਆ ਰੂਟੋ ਪਾਣ ਜੇ ਗੁਰੂ ਆ ਤਾ ਫਸਿਆ ਹੋਇਆ ਨਾਨਕ ਦੇ ਫੇਲੀ ਮੁਕਤਾ ਇਹਨਾਂ ਜੇ ਤਾਂ ਨਾ ਬਿਰਗਤ ਸਜਣ ਜੇ ਫੇਕ ਧੂੜ ਪਬੀਤ ਤੇਰੇ ਜਰੂਵ ਧੂੜ ਪਬੀਤ ਹੈ ਧੂੜ ਤਾਂ ਲੱਗ ਜਾਂਦੀ ਹੈ ਫਿਛਦੀ ਉਹ ਘੜੀਆਂ ਹੁੰਦੀਆਂ ਨੇ ਟਾਇਰ ਕਦੇ ਉਹ ਯੋਯੀ ਦੀ ਅਕੀਮਤੀਆਂ ਉਹ 5-10 ਸਾਲ ਬਾਅਦ ਆ ਖੋਲਦੇ ਨੇ ਘਰ ਦੋ ਚੋਂ ਵੀ ਨਿਕਲ ਹੁੰਦੀ ਐ ਕੇਅਰ ਡਾਈਡ ਘੜੀਆਂ ਚ ਕੇਅਰ ਘੜੀਆਂ ਦਾ 10000 ਰੁਪਏ ਦੀਆਂ ਜਾਂ ਖੋਲਦੇ ਨੇ 5-7 ਸਾਲ ਬਾਅਦ ਘਰ ਉੱਥੇ ਵੀ ਹੁੰਦੀ ਐ ਉੱਥੇ ਕਿਵੇਂ ਪਹੁੰਚ ਗਈ ਬਈ ਉਹ ਮਿੱਟੀ ਆ ਘਰ ਦੋ ਵੀ ਪਹੁੰਚ ਗਈ ਇਹ ਪਹੁੰਚ ਜਾਂਦੀ ਐ ਸਾਰੇ ਇਦੋਂ ਵੀ ਨਾਨਾ ਹੋਵੇ ਗਰਦਨਾ ਵੀ ਉਦੋਂ ਤੇ ਗਰਦ ਪਹੁੰਚ ਗਈ ਨਾਨਾ ਹੋਏ ਸੋ ਜਾਏ ਛੋਟੇ ਤੋਂ ਛੋਟਾ ਛੋਟੇ ਤੋਂ ਛੋਟਾ ਪਰਮਾਣੂ ਹੁੰਦਾ ਪਰਮਾਣੂ ਉਦੋਂ ਵੀ ਛੋਟਾ ਹੁੰਦਾ ਫਿਰ ਇਲੈਕਟ੍ਰੋਨ ਪ੍ਰੋਟੋਨ ਡਿਊਟਰੋਨ ਕਿਸ ਕੋਈ ਗੁਣ ਤਿਆਗ ਕੇ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਦੇ ਤਿੰਨੇ ਗੁਣ ਫੂਕੇ ਨਾ ਤਿਆਗ ਕੇ ਜਾਲ ਕੇ ਸਭੇ ਬੁੱਧੀ ਜਾਲੀਆਂਨ ਸ਼ਕਤੀ ਕੇ ਕੇ ਹਾਂਜੀ ਓਮੇ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਸਤਗੁਰ ਮਿਲਿਆ ਓਮੇ ਗਈ ਜੋਤ ਰਹੀ ਸਭ ਆਈ ਮਨ ਅਸਥੂਲ ਹੈ ਕਾਦੀ ਮੰਨਤਾ ਅਸੂਲ ਹੈ ਅਸੂਲ ਕਹਿਣਾ ਹੈ ਥੋਸ पथर, पहाड़ माया माया रूप है ओबे को त माया रूप है अतुल क्यों कर विच जाए ओदे भी ते किधर तिकड़ ज्यू हो क्यों जाए ठीक है सतगुरु मिलिया होम गई जूत रही सब आए जा सतगुरु मिलता हो चली जाती है ठीक ਜੋਤ ਤਵੇ ਹਿਸਾਬ ਆਏ ਜੋਤੇ ਰਹਿ ਜਾਂਦੀ ਹੈ ਜੋਤ ਨਿਕਲ ਜਾਂਦੀ ਹੈ। ਆ ਜੋਤ ਜੋਤ ਰਹਿ ਜਾਂਦੀ ਹੈ ਉਹ ਵੀ ਨਿਕਲ ਜਾਂਦੀ ਹੈ। ਬੱਦਲਾਂ ਦੀ ਜੋਤ ਇੱਥੇ ਦਿਖਣ ਲੱਗ ਜਾਂਦੀ ਹੈ। ਕਾਲੇ ਬੱਦਲਾਂ ਜੋਤ ਨਿਕਲ ਕੇ ਫੇਰ ਵੀ ਇੱਥੇ ਪ੍ਰਭਾਵ ਦੱਸਦੀ ਹੈ ਵੀ ਹਾਂ ਜੋਤ ਹੈਗੀ ਸੂਰਜ ਹੈਗਾ। ਹਾਂਜੀ। ਇਹ ਜਿਓ ਸਦਾ ਮੁਕਤ ਹੈ। ਤਹਜੇ ਰਹਾ ਸਮਾਏ। ਇਹ ਜਿਓ ਸਦਾ ਮੁਕਤ ਹੈ। ਇਹ ਜਿਸ ਵਕਤ ਜਿਓ ਜੋਤ ਮਰ ਜਾਂਦਾ ਫਿਰ ਮੁਕਤ ਹੈ ਜੋਤ ਸਰੂਪ ਜੀਓ ਮੁਕਤ ਹੈ ਸਦਾ ਮੁਕਤ ਹੈ ਜੇ ਜਰੇ ਆਸਮਾਏ ਚੱਕ ਟਿਕ ਜਾਂਦਾ ਨਾ ਇਹ ਤੋਲੂ ਫਿਰ ਆਪਣੇ ਮੂਰਤਿਸੂ ਆ ਜਾਂਦੇ ਫਿਰ ਇੱਕ ਹੋ ਜਾਂਦਾ ਫਿਰ ਇੱਕ ਹੋ ਜਾਂਦਾ ਫਿਰ ਇਹ ਖੁਦ ਹੋ ਜਾਂਦਾ ਖੁਦ ਨਿਰੰਕਾਰ ਹੋ ਜਾਂਦਾ ਹੈ ਨਿਰੰਕਾਰ ਹੈ ਹੀ ਕਹ ਫਿਰ ਕੀ ਹੈ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹਣੇ ਮਹਲ ਨਿਰੰਕਾਰ ਕੇ ਦੇਸ ਜਾਂ ਜਉ ਜਦਾ ਆਪ ਨਿਰੰਕਾਰ ਹੋ ਜੂਗਾ ਉਹ ਦੇਸ ਨਿਰੰਕਾਰ ਦਾ ਸਾਰੇ ਰੁੱਤਾਂ ਰਿਹਾ ਜਾਂ ਬਿਰੰਕਾਰ ਦਾ ਰੁੱਤਾਂ ਰਿਹਾ ਨਾਲਕ ਨਾਲ ਗਾਲੀਆ ਤੇ ਪਿੰਜਰੇ ਤੋਂ ਬਾਹਰ ਨਿਰੰਕਾਰ ਨੇ ਤੇ ਪਿੰਜਰੇ ਦੇ ਉੱਪਰ ਨਿਰੰਕਾਰ ਠੀਕ ਹੈ ਜੀ पौड़ी प्रभु संसार उपाय के बस अपने कीता गणते प्रभु ना पाई है दूजे परमिता संसार पैदा कीता आप आपने कीता संसार पैदा कीता फिर अपने काबूच कीता पिंजरे च पाके रखया होया ऐ नहीं भी साथ नहीं आंदा बाहर कुछ आंदा नहीं है जानता नहीं ਆਰੇ ਆਗਿਆੰਦਾ ਬਾਰੇ ਹੁਕਮ ਨਹੀਂ ਹੁੰਦਾ। ਜਾਂਦਾ? ਆਪਣੇ ਹੌਂਸਲਾ ਰੱਖਿਆ ਹੋਇਆ ਆਪਣੇ ਦੇਖਣ ਦਾ ਰੱਖਿਆ ਹੋਇਆ ਇੱਥੇ। ਉਹ ਤਾਂ ਦੇਖਦਾ ਇਹਨਾਂ ਨੂੰ। ਜੇ ਛੇੜ ਹੈਗੇ ਤਾਂ ਹੀ ਦੇਖਦਾ ਹੈ। ਦੀ ਲੋੜ ਲੋੜ ਹੁੰਦੀ ਹੈ ਦੇ ਦਿੰਦਾ। ਬਸ ਆਪਣੇ ਕੀਤਾ। ਗਣਤੈ ਪ੍ਰਭੂ ਨ ਪਾਈਐ ਦੂਜੇ ਪਰਮਿਤਾ ਆ ਜਿਹੜੀਆਂ ਗਣਤੀਆਂ ਨਾ ਐਡੀਆਂ ਵਾਲਾ ਫੇਲਦੀਆਂ ਨੇ ਇੰਨੇ ਫੁੜਕੇ ਦੀ ਫੇਲ ਨਹੀਂ ਆ ਨੇ ਦਸਵੰਦ ਕੱਢਣੇ ਨੇ ਨ ਸੋਏ ਉਹ ਗਿਣਤੀ ਤੋਂ ਪਰੇ ਆਗਣਤ ਸੱਚਾ ਸੋਏ ਅਗਨਤ ਕਿਰਤੀ ਤੋਂ ਪਰੇ ਹੈ ਜੇ ਗਣਤੀ ਰੱਖਣੀ ਹੈ ਤਾਂ ਅਗਨਤ ਨਾਲ ਸਰਪਰਕ ਨਹੀਂ ਹੋ ਸਕਦਾ ਕਿਰਤੀ ਛੱਡ ਕੇ ਅਗਨਤ ਹੋ ਸਕਦਾ ਹੈ ਕਿਰਤੀ ਦਾ ਛੱਡਣੀ ਸੀ ਪਹਿਕੇ ਗਣਤੀ 'ਚ ਇਹ ਗਣਤੀ 'ਚ ਪਾਉਣੇ ਵਾਲੇ ਫਸਾਉਣੇ ਵਾਲੇ ਨੇ ਫਾਂਸਣ ਕੀ ਵੀ ਦੀ ਕੋ ਜਾਣੇ ਇਹ ਫਸਾਉਣ ਵਾਲੀਆਂ ਵਿਧੀਆਂ ਨੇ ਸਾਰੇ ਕਿਰਤੀ ਦਾ ਵਿਖਾ ਪ੍ਰਭ ਸੰਸਾਰ ਉਪਾਇ ਕਿ ਜਦੋਂ ਲਿਖਿਆ ਹੈ ਸੰਸਾਰ ਇਹ ਪਰਮੇਸ਼ਰ ਨੇ ਨੂੰ ਪਾਇਆ ਕਿ ਪ੍ਰਭ ਨੇ ਨੂੰ ਪਾਇਆ ਪ੍ਰਭ ਦੇ ਬਿਨਾਂ ਕਿਵੇਂ ਪਾਇਆ ਹੋ ਗਿਆ ਪਰਮੇਸ਼ਰ ਵਿੱਚ ਵੜ ਗਿਆ ਪਰਮੇਸ਼ਰ ਨੇ ਤਾਂ ਹੁਕਮ ਹੀ ਦਿੱਤਾ ਹੈ ਅੱਛਾ ਜੀ ਪਰਮੇਸ਼ਰ ਨੇ ਹੀ ਆਗਿਆ ਪਾਇਆ ਦਾ ਇਹ ਨਹੀਂ ਹੈ ਹਾਂ ਹਾਂ ਉਹਦੀ ਤਾਂ ਆਗਿਆ ਆ ਗਿਆ ਆਗਿਆ ਦੀ ਥਾਂ ਇਹ ਸ਼ਰੀਰ ਦੀ ਪਾਲਣਾ ਉਹਨੇ ਚਲਦੀ ਹੈ ਸ਼ਰੀਰ ਨੂੰ ਪਾਲੂ ਸ਼ਰੀਰ ਪਰਮ ਦੇ ਵਸਦਾ ਨਹੀਂ ਪਾਲਣਾ ਆਏਗਾ ਪੀਪੋ ਆਲਾ ਪਰਮਦੇਵ ਦੀ ਗੱਲ ਨਹੀਂ ਹੈ ਬਿਨਾ ਉਹਦੇ ਹੁਕਮ ਦੇ ਮਾਨਅਰ ਚਿੱਤ ਅਟਾਟਦੀ ਹੋ ਸਕਦੀ ਫੈਦੀ ਗੱਲ ਤਾਂ ਮਨੇ ਸਕਦਾ ਮਾਇਆ ਦੀ ਪੈਦਾ ਹੋ ਸਕਦੀ ਤੇ ਬਗਣਾ ਪਿਆ ਬਗਣਾ ਤੇ ਜਲ ਹੋਏ ਤੇ ਜਲ ਦੇ ਨਾਲ ਜੋੜਨਾ ਇਹਦਾ ਜੋੜ ਲਾਉਣਾ ਇਹਦਾ ਜੋੜ ਲਾ ਕੇ ਦੀ ਪਰਮੇਸ਼ਰ ਦੀਆਂ ਨੂੰ ਇਹਦੇ ਬਦਲਦੀ ਖੁਰਾਕ ਦੇਣੀ ਇਹਨੂੰ ਗਿਆਨ ਦੇਣ ਨਾਲ ਦੀ ਨਾਲ ਇਜ਼ਾਰਾ ਪਰਮੇਸ਼ਰ ਦਾ ਕੰਮ ਪਰ ਪ੍ਰਭ ਨੇ ਆਪਣਾ ਹਿੱਸਾ ਕੱਢ ਕੇ ਤੇ ਵਿੱਚ ਪਾਇਆ ਹੈ ਨਾ ਅੱਦ ਪਿਆ ਜੱਟ ਨੇ ਸਭ ਕੁਝ ਕੀਤਾ ਹੈ ਜ਼ਮੀਨ ਵੀ ਵਾਈ ਹੈ ਡੀਜ਼ਲ ਵੀ ਫੂਕਿਆ ਉਹ ਜੇ ਬੀਜ ਵੀ ਪਾਇਆ ਬੀਜ ਹੀ ਪਿਆ ਆਇਆ ਖੇਤ ਜੇ ਫੂਕੇ ਪ੍ਰਭ ਵੀਜ ਹੈ ਖੇਤੀ ਕਿਵੇਂ ਜਮੂ ਪਾਣੀ ਦਬੇ ਜਾਇਆ ਨਾ ਆਂ ਦੇ ਦੀ ਬਸ ਜਾ ਜੀ ਵੀ ਰੋਹੀ ਹੈ ਪੱਕੀ ਬੱਡਲਵੇ ਪੱਕੀ ਬੱਡਲਵੇ ਵਾਸ ਹੋਦਾ ਹੈ ਖਾਦਨੇ ਮਰਜੀ ਬਾਦਵੇਂ ਨਾ ਪਾਵੇ ਉਹਦੇ ਵਾਸਤੇ ਹੈ ਉਹਦੇ ਵਾਸਤੇ ਬਾੜ ਕੁਛ ਨਹੀਂ ਹੈ ਜਿਹੜਾ ਮਰਜੀ ਗਿਆਨ ਦੇ ਦੇਵੇ ਕਦੇ ਕਦੇ ਬਰਸਾਤ ला ਦਿੰਦਾ ਹੋ ਬਰਮ ਗਿਆਨ ਦੀ ਬਰਖਾ ਕਰ ਦਿੰਦਾ ਕਦੇ ਕਦੇ ਕਰਦਾ ਹੀ ਦੀ ਜਦੋਂ ਕਰਦਾ ਨਹੀਂ ਉਦੋਂ ਲੋਕ ਵਿਚਾਰੇ ਪੜਖਦੇ ਮਰਜੀ ਦੇ ਦੇਈ ਜਾਂ ਕਰਦਾ ਤਾਂ ਦਰ جلبے ਜਵੇ ਹੋ ਖੰਤ ਹੋ ਜਾਂਦੇ ਨੇ ਮੈਂ ਪਰ ਇਹ ਤੁਸੀਂ ਪ੍ਰਭ ਦੀ ਗੱਲ ਕਰ ਰਹੇ ਹੋ ਕਿ ਪਰਮੇਸ਼ਰ ਦੀ ਗੱਲ ਪਰਮੇਸ਼ਰ ਦੀ ਗੱਲ ਹੈ ਬਾਸ ਜੀ ਨੇ ਬਿਨਾ ਪੈਦਾ ਨਹੀਂ ਹੋ ਸਕਦਾ ਪਾਪ ਪੁੰਨ ਦੋਨੋਂ ਪਾਈ ਦੂ ਬਿਲਕੇ ਉਹ ਬੀਜ ਬਿਨਾ ਜੱਟ ਕਰੂਗਾ ਵਾਹੀ ਜਾਊਗਾ ਜਾਂ ਬੀਜੇ ਦੀ ਹੈ ਖੇਤ ਕੇ ਮੈਂ ਜਪੂਗਾ ਪ੍ਰਭ ਸੰਸਾਰ ਉਪਾਇ ਕੇ ਵਾਸ ਆਪਣੇ ਕੀਤਾ ਇਹ ਪਰਮੇਸ਼ਰ ਨੇ ਪ੍ਰਭ ਆਪਣੇ ਵਾਸ ਕੀਤਾ ਹੋਇਆ ਸਾਰਾ ਸੰਸਾਰ ਹੀ ਵਾਸ ਪ੍ਰਭ ਵਿਚ ਆ ਨੇ ਸਾਰਾ ਸੰਸਾਰ ਆਪਣੇ ਵਾਸਤ ਪਰਮੇਸ਼ਰ ਦੇ ਅਰਥਾ ਡੋਢੀ ਜਾਣਦੇ ਪ੍ਰਭ ਨੇ ਸੰਸਾਰ ਉਪਾਇਆ ਤਾਂ ਹੈ ਪਰ ਵਾਸ ਪਰਮੇਸ਼ਰ ਦੇ ਪ੍ਰਭ ਨੇ ਵੀ ਹੁਕਮ ਦੇ ਬਿਨਾਂ ਕਿਵੇਂ ਉਪਾਇਆ ਪਰ ਬੀਜੀ ਦੀ ਜਰੂਰ ਹੈ ਕਣ ਤੇ ਜਿਬਰੀ ਜਰੂਰ ਹੈ ਕਲਪਨੀ ਪਰਮੇਸ਼ਰ ਕਰਨ ਵਾਲਾ ਹੋਰ ਹੈ ਵਾਸ ਜੀ ਨੇ ਕੀਤਾ ਉਹ ਪਰਮੇਸ਼ਰ ਹੈ ਹਾਂ ਤਾਂ ਅੱਗੇ ਫਿਰ ਪ੍ਰਭੂ ਅਗਲੀ ਲਾਈਨ ਚ ਪ੍ਰਭੂ ਆ ਰਹੇ ਠੀਕ ਹੈ ਜੀ ਪ੍ਰਭ ਪ੍ਰਭ ਦਾ ਫਜ਼ਲ ਹੈ ਕੰਮ ਆ ਫੇਰ ਨਾ ਗਿਆ ਹੁਣ ਗਣਤ ਕਹਿੰਦਾ ਤੇਰੇ ਮੈਂ ਇੰਨੇ ਘੰਟੇ ਕਰਦਾ ਤਬ ਤੇਰੇ ਇੰਨੇ ਘੰਟੇ ਤੇਰੇ ਵਾਸਤੇ ਕੱਢਦਾ ਉਹਦੇ ਨਾਲ ਗਿਣਤੀ ਗੱਲ ਨਾ ਕਰ ਬੰਦਲ ਨਾ ਉਹ ਤੈਨੂੰ ਗਿਣਤੀ ਦੀਆਂ ਕਦੇ ਕਿਹਾ ਉਹਨੇ ਤੇ ਪਿੰਦੀ ਆਤੀ ਵਧਗਾ ਤੇ ਪਿੰਦੇਗਾ ਤੇ ਕਹੇ ਜਦੋਂ ਗਿਣਤੀ ਮਣਤੀ ਖੁਦ ਨਹੀਂ ਥੋੜਨਾ ਲੱਗਦਾ ਤੁਸੀਂ ਕਾਹਦੇ ਰੱਖਦੇ ਨੂੰ ਇਹ ਪਰ ਪ੍ਰਭ ਨੂੰ ਇਹ ਕਿਹਾ ਵੀ ਪ੍ਰਭ ਗਿਣਤੀ ਨਾ ਰੱਖੇ ਤਾਂ ਜੀਵ ਨੇ ਪ੍ਰਭੂ ਚ ਲੀਨ ਹੋਣਾ ਠੀਕ ਹੈ ਜੀ ਜੀਵਾਤਮਾ ਜੀਵਾਤਮਾ ਗਿਣਤੀ ਨਾ ਰੱਖੇ ਪ੍ਰਭ ਜੀਵੇ ਠੀਕ ਹੈ ਪ੍ਰਭ ਨੂੰ ਚੀਬ ਬੁੱਧ ਕੇ ਚੱਲੋ ਇਹਨੂੰ ਪ੍ਰਭਤਾ ਬੁੱਧੀ ਕਹਿ ਰਹੀ ਹੈ ਬੁੱਧੀ ਪ੍ਰਭਤਾ ਕਹਿ ਰਹੀ ਹੈ ਉਦੋਂ ਵੇਲੇ ਤੱਕੇ ਕਹਿ ਰਹੀ ਹੈ ਜਿੰਨਾ ਜਿੰਨੇ ਸਾਹ ਲੈਂਦਾ ਤਾਂ ਆਉਂਦਾ ਆਪਣੇ ਮਤਲਬ ਨੂੰ ਪ੍ਰਭ ਕਹਿ ਹੈ ਬੁੱਧੀ ਠੀਕ ਹੈ ਜਦ ਕੋਈ ਗੱਲ ਕਹਿੰਦਾ ਜਦ ਕੋਈ ਗੱਲ ਚੰਗੀ ਕਹਿੰਦਾ ਤਾਂ ਬੁੱਧੀ ਵੀ ਹੈ ਹਾਂਜੀ ਸਤਗੁਰ ਮਿਲੀਐ ਜੀਵਤ ਮਰੈ 부ਝ ਸੱਚ ਸਮੀਤਾ ਜੇ ਸਤਗੁਰ ਦੀ ਗੱਲ ਸਮਝ ਜੇ ਸਤਗੁਰ ਦੀ ਦਵਾਈ ਅਸਰ ਗਈ ਫੇਰ ਗੱਲ ਬਲਦੀ ਏ ਸਤਗੁਰ ਦਾ ਮੂੰਹ ਦੇਖੇ ਤੇ ਗੱਲ ਨਹੀਂ ਬਣਦੀ 부ਝ ਸੱਚ ਸਮੀਤਾ ਆ ਜੇ ਸਤਗੁਰ ਨੇ ਕਿਹਾ ਲਵੇ ਜੇ ਤਾਂ ਸਾਧਗੁਰ ਮਿਲਿਆ ਜਲਦੀ ਗੱਲ ਬੁੱਝਲੀ ਫਿਰ ਸੱਚ ਸੁਬੀਟਾ ਸੱਚ ਵਿੱਚ ਸਮਾਜ ਜਾਂਦਾ ਸਾਧਗੁਰ ਵਿੱਚ ਨਹੀਂ ਸਮਾਉਂਦਾ ਸੱਚ ਵਿੱਚ ਸਮਾਜ ਜਾਂਦਾ ਸੱਚ ਵਿੱਚ ਉਹ ਦੋਏ ਸੱਚ ਵਿੱਚ ਸਮਾਉਂਦੇ ਨੇ ਸਾਧਗੁਰਾ ਦੇ ਠੀਕ ਹੈ ਜੀ ਇਹ ਸਾਧਗੁਰ ਵੀ ਉਹਨਾਂ ਜਰੇ ਜਿੰਨਾ ਜਰ ਉਹ ਨਾਲ ਨਹੀਂ ਇਹਦੇ ਹਰ ਮੇਲ ਮਲੀਤਾ ਸ਼ਬਦ ਖੋਈ ਹੈ ਹੋਂਦ ਹੈ ਜੀਤੀ ਵੀ ਗਈ ਹੈ ਜਿੱਦੀ ਵੀ ਹੋਂਦ ਦਾ ਨਾਸ ਹੋਇਆ ਗੁਰਮਤ ਦੇ ਉਪਦੇਸ਼ ਦੇ ਬਿਨਾ ਅੱਜ ਤੱਕ ਦੀ ਹੋਇਆ ਸਾਬਤ ਕਰੇ ਕੋਈ ਸ਼ਬਦ ਹੈ ਹੋਂਦ ਖੋਈ ਹੈ ਆ ਜਿਹੜਾ ਸ਼ਬਦ ਉਪਦੇਸ਼ ਹੈ ਗੁਰਮਤ ਦਾ ਇਹ ਆ ਪਹਿਲਾਂ ਕਿਸੇ ਹੋਰ ਭਾਸ਼ਾ ਵਿੱਚ ਸੀ ਜੇ ਤੋ ਕਬੀਰ ਨੇ ਪੜਿਆ ਉਹ ਤੋਂ ਪਹਿਲਾਂ ਕਿਸੇ ਹੋਰ ਪਾਸ਼ਾ ਵਿੱਚ ਸੀ ਉਹ ਤੋਂ ਪਹਿਲਾਂ ਕਿਸੇ ਹੋਰ ਪਾਸ਼ਾ ਵਿੱਚ ਸੀ ਉਪਦੇਸ਼ ਹੋਈ ਹੈ ਉਪਦੇਸ਼ ਹਰ ਦੇ ਨਾਲ ਮੇਲ ਫੀਤਾ ਹਰ ਨਾਲ ਇੱਕ ਹੋ ਗਿਆ ਮੇਲ ਮਿਲ ਗਿਆ ਠੀਕ ਹੈ ਸਭ ਕੁਝ ਜਾਣੇ ਕਰੇ ਆਪ ਆਪੇ ਵਿਗਸੀਤਾ ਸਭ ਕੁਝ ਜਾਣਦਾ ਹੈ ਜੀਵ ਇਹ ਸਭ ਕੁਝ ਜਾਣਦਾ ਘੱਟ ਕੁਝ ਦੀ ਜੇ ਗੁਰਬਾਣੀ ਸੁਣ ਲਈ ਦਸ ਜਾਣਦਾ ਜੇ ਗੁਰਬਾਣੀ ਸੁਣ ਲਈ ਨਹੀਂ ਪਹਿਣਾ ਇਹਦੀ ਬਰਤੀ ਹੈ ਪੁੱਠੇ ਦਾ ਪਹਿਣਾ ਸਿੱਧੇ ਪਹਿਣ ਜੇ ਇਹਨਾਂ ਗਿਆਨ ਪੜ ਕੇ ਠੱਗੀਆਂ ਮਾਰਨ ਲੱਗ ਜਵੇ ਫੇਰ ਅ ਗਿਆਨ ਪੜੇ ਗੁਰਦੁਆਰਿਆਂ ਦੇ ਜੋ ਅਕੀ ਠੱਗੀਆਂ ਮਾੜੀ ਦੀ ਬੈਠੇ ਗੁਰਦੁਆਰੇ ਨੂੰ ਵੀ ਬਣਾਈ ਦੀ ਬੈਠੇ ਦੁਆਰਾਂ ਬਣਾਈ ਦੀ ਬੈਠੇ ਜਿਹੇ ਦਾ ਜਾਣ ਪੁੱਝ ਕੇ ਪਤਾ ਹੁੰਦੇ ਉਸ ਵੀ ਉਹ ਬਰੀ ਦੀ ਕਰ ਦਦੇ ਉਹ ਸਰਕਾਰ ਸੋ ਜਾ ਕਰ ਦਦੀਏ ਕਿਹੜੀ ਗੱਲ ਦਾ ਨਹੀਂ ਪਤਾ ਕਰੇ ਆਪ ਕਰਦਾ ਠੱਠਾ ਕਰਦਾ ਪੈਰ ਕੋਲ ਆ ਕਾਫਲ ਹੋ ਕੇ ਆਪਣੇ ਆਸਤਾਂ ਮਾਰਦਾ ਆਪਣੇ ਉੱਤੇ ਆਪਣਾ ਕਬੂਸ ਮਾਰਦਾ ਤਾਂ ਸਮਾਲਦਾ ਪਰਮੇਸ਼ਰ ਨੇ ਸਾਤੂੜੇ ਭੈਣ ਸਤਗੁਰ ਨਾ ਉਪਦੇਸ਼ ਦੇਣਾ ਬੰਨਣਾ ਉਹਦੀ ਮਰਜ਼ੀ ਹੈ ਜੇ ਮੰਨੂਗਾ ਮਿਲੂਗਾ ਪਰਮੇਸ਼ਰ ਦਾ ਸਦਾ ਬਗਾਸ ਹੈ ਭਗਤ ਦਾ ਸਦਾ ਹੀ ਤਾਂ ਸਦਾ ਬਗਾਸ ਨੇ ਬੁਰਗੀਤਾ ਤਾਂ ਇਹ ਹੈ ਨਹੀਂ ਬਿਰਸਣਾ ਇਹਦੀ ਮਰਜ਼ੀ ਹੈ ਜਿਹੜਾ ਫੁੱਲ ਡੋਡੀ ਬਣੀ ਹੈ ਖੇਡਣਾ ਉਹਨੇ ਆ ਕਿ ਨਹੀਂ ਖੇਡਣਾ ਡੋਡੀ ਬਣੀ ਹੈ ਉਹਨਾਂ ਖਿੜਨਾ ਨਹੀਂ ਖਿੜਨਾ ਖਿੜਿਆ ਹੋਇਆ ਵਿੰਦਿਆ ਹੋਇਆ ਹਾਂਜੀ